ਸ਼ਲੋਕ ਮਹੱਲਾ ਤੀਜਾ ਇਹ ਜਲ ਸਭ ਤੈ ਵਰਸਦਾ ਵਰਸੈ ਭਾਏ ਸੁਭਾਈ ਸੇ ਬਿਰਖਾ ਹਰੀਆਵਲੇ ਜੋ ਗੁਰਮੁਖੀ ਰਹੇ ਸਮਾਈ ਇਹ ਜਲ ਸਭ ਤੈ ਵਰਸਦਾ ਜਿਹਦੇ ਉੱਤੇ ਵਰਸਦਾ ਉਹ ਥਾਲਾ ਜਿਹੜਾ ਵਰਸਦਾ ਉਹ ਵੱਲ ਹੈ ਥਾਲ ਤਾਂ ਸਰੀਰ ਹੈ ਨਾ ਸਰੀਰ ਦੇ ਅੰਦਰ ਜਿਹੜਾ ਹੈ ਬੁੱਧੀ ਤੇ ਵਰਸਦਾ ਜਲ ਅਸਲ ਕੇ ਹੈ ਬੁੱਤੀ ਨੂੰ ਸੰਬੰਧ ਬਣਾਉਂਦਾ ਹੈ ਬੁੱਤੀ ਨੂੰ ਬਦਲ ਰਿਹਾ ਹੈ ਸਤ ਬਦਲੀ ਸਿੱਧ ਭਾਈ ਜਾਂ ਬਦਲਦੀ ਰਹੂ ਸਮਝ ਆ ਸਾਰੀ ਗੱਲ ਦੀ ਤਾਂ ਸਾਰਿਆਂ ਦਾ ਹੀ ਹੈ ਪਰ ਜੇ ਭਾਏ ਸੁਭਾਏ ਆ ਨੂੰ ਬਸਦਾ ਕੁਝ ਕੁਝ ਉਹਦੇ ਪਿੱਛੇ ਛੁਪਾ ਬਸਦੇ ਬਦ ਪਾਵਤ ਨੂੰ ਨਹੀਂ ਬਸਦਾ ਸੁਭਾਏ ਭਾਏ ਕੀ ਆ ਸੁਭਾਏ ਇਹਨੂੰ ਕੁਝ ਸਵਾਲ ਵਾਸਤੇ ਭਲੇ ਵਾਸਤੇ ਬਸਦਾ ਇਹਦੇ ਬੁਰੇ ਵਾਸਤੇ ਨਹੀਂ ਬਸਦਾ ਗੁਰਬਾਣੀ ਜੇ ਅਸੀਂ ਪ੍ਰਚਾਰ ਕਰਦੇ ਆਂ ਸਭ ਤੇ ਭਲੇ ਵਾਸਤੇ ਕਰਦੇ ਆਂ ਬੁਰੇ ਵਾਸਤੇ ਨਹੀਂ ਕਰਦੇ ਪਰ ਸਾਡੇ ਕਰਮ ਕੁਝ ਐਸੇ ਰਹੇ ਨੇ ਕਿੰਝ ਸਿਖਾ ਦੇ ਜੀ ਤੋ ਇਹ ਲੱਗਦਾ ਸੀ ਵੀ ਸਾਡਾ ਭਾਵਨਾ ਜਿਹੜੀ ਹੈ ਦੁਰਭਾਵਨਾ ਨੂੰ ਵਿੱਚ ਰਾਜ ਕਰੇਗਾ ਖਾਨਸਾ ਕਰਕੇ ਕੁਝ ਅਸੀਂ ਈਡਾਂ ਕੰਮਾਂ ਕਰਨਾਗੇ ਕੁਝ ਉਹਦੀ ਧਵੇਜ ਭਾਵਨਾ ਆ ਗਈ ਪ੍ਰੈਕਟੀਕਲੀ ਅਸੀਂ ਸੁਪਾਏ ਨਹੀਂ ਰਹਿ ਸਕੇ ਇਹ ਫਰਕ ਤੇ ਸੁਪਾਏ ਸੁਪਾਏ ਇਹ ਭਗਤਾਂ ਦੇ ਜਿਹੇ ਆਇਆ ਹੈ ਗੁਰਮੁਖੀ ਅੰਦੇਸੇ ਜਿਆ ਹੈ ਇਹ ਜਨ ਸਭ ਤੋਂ ਵਰਸੇ ਦਾ ਪਾਉ ਸਭ ਤੋਂ ਵਰਸੇ ਕੋਈ ਦੂਸਰ ਬੋਲ ਕੇ ਸਾਈ ਦੁਨੀਆ ਚ ਕਿਸੇ ਦੇ ਵੀ ਵਰਸੇ ਜਿਸ ਪਾਏ ਵਰਸੇ ਫਿਰ ਕੋਈ ਵੀ ਰੋਜ਼ ਦੀ ਕਰਦਾ ਇਹ ਭਾਵਨਾ ਚ ਫਰਕ ਪੈ ਜਾ ਫਿਰ ਵਿਰੋਧ ਕਰਦਾ ਹਾਂਜੀ ਸੇ ਹਰਿਆਵਲੇ ਜੋ ਗੁਰਮੁਖੀ ਰਹੇ ਸਮਾਈ ਸੇ ਹਰਿਆਵਲੇ ਉਹ ਤਾਂ ਹਰੀਆਬਲੇ ਹੋ ਜਾਂਦੇ ਨੇ ਫਿਰ ਉਹ ਜੱਬਦੇ ਨੇ ਨਾ ਇੱਕ ਵੇਟ ਓਗੇ ਹੋਏ ਹਰੀਆਬਲੇ ਹੁੰਦੇ ਨੇ ਬਹੁਤੀ ਛਾਂ ਪਤਰਾਲੀ ਹੋ ਜਾਂਦੀ ਉਹਨਾਂ ਦੀ ਗੁਰਮੁਖੀ ਰਹਿਣ ਸਮਾਏ ਜਿਹੜੇ ਗੁਰਮੁਖੇ ਸਮਾ ਕੇ ਰਹਿੰਦੇ ਗੁਰਮੁਖੇ ਫਿਰ ਖੜੋਣ ਉਹ ਗੁਰਮੁਖੀ ਨੇ ਬਰਖ ਕਿਹਾ ਅਤਾ ਕੀ ਦੇਖ ਜਾਂ ਜਿੱਦੀ ਬਹੁਤੀ ਛਾਂ ਪਤਰਾਲੀ ਆ ਪਈ ਆ ਮਾਤਾ ਕੀ ਵੀ ਨੂੰ ਸੈਜ ਲੱਗੀ ਹੋਈ ਆ ਇਹੀ ਐ ਗੁਰਮੁਖੀ ਮਾਤਾ ਕੀ ਵੀ ਤੇ ਹਰੀਆਬਲੀਆ ਬਹੁਤੀ ਛਾਂ ਪਤਰਾਲੀ ਇਹਦੀ ਹੋਈ ਆ ਸੋ ਜੀ ਨਾਨਕ ਨਦਰੇ ਸੁਖ ਹੋਏ ਇਹਨਾਂ ਜਨਤਾ ਦਾ ਦੁੱਖ ਜਾਏ। ਜਦ ਨਦਰੇ ਸੁਖ ਹੋਏ ਉਹ ਕਿਰਪਾ ਧਾਰ ਕੇ ਵਰਸਦਾ ਹੋ। ਤੇ ਕਿਰਪਾ ਧਾਰ ਕੇ ਵਰਸਦਾ ਸੁਖ ਹੈ ਦੁੱਖ ਨਹੀਂ ਹੈ। ਨਦਰੇ ਸੁਖ ਹੋਏ ਇਹਨਾਂ ਜਨਤਾ ਦਾ ਦੁੱਖ ਜਾਏ। ਜਨਤਾ ਦਾ ਦੁੱਖ ਚਲਿਆ ਜਾਂਦਾ। ਉਹਦੀ ਇੱਛਾ ਇਹ ਹੈ ਇਹ ਬਸੌਣ ਦੀ। ਅਸੀਂ ਕੀ ਚਾਹੁੰਦੇ ਹਾਂ? ਅਸੀਂ ਵਿਰੋਧ ਕਿਉਂ ਕਰਦੇ ਆ ਜਿਹੜੇ ਕਲਦੇ ਵਾਲੇ ਵਿਰੋਧ ਨੇ ਉਹ ਕਿਉਂ ਕਰਦੇ ਨੇ ਸਾਰੇ ਨਹੀਂ ਕਰਦੇ ਆਗੂ ਕਰਦੇ ਨੇ ਸ਼ਹਿਦੋਲਾਂ ਦਾ ਆਪਣਾ ਰਾਜ ਆ ਜਿਹੜਾ ਸੰਸਾਰ ਦਾ ਹੰਕਾਰ ਹੈ ਉਹਦੇ ਤੇ ਚੋੜ ਬਸ ਰਾਜ ਨੂੰ ਆਪਣੇ ਪਕੜ ਨੂੰ ਦੁਨੀਆ ਤੋਂ ਢਿੱਲੀ ਨਹੀਂ ਹੋਣ ਦੇ ਨਹੀਂ ਚਾਹੁੰਦੇ ਹਾਂਜੀ ਮਹੱਲਾ ਤੀਜਾ ਪਿੰਨੀ ਰਹਿਣ ਚਮਕਿਆ ਉਠਾ ਸ਼ਹਿਬਰ ਲਾਏ ਜਿੱਤ ਉਠੇ ਅੰਨ ਧਨ ਬਹੁਤ ਉਪਜੈ ਜਾ ਸੋ ਕਰੇ ਰਜਾਈ ਕਿੰਨੇ ਰਹਿਣ ਜ਼ਿੰਦਗੀ ਦੀ ਰਾਤ ਦੇ ਵਿੱਚ ਬੁੱਧੀ ਬਣ ਬੁੱਧੀ ਦੋਏ ਪੈ ਜਗੇ ਰਾਤ ਨੂੰ ਪਿਆਸ ਪੈ ਜਗੇ ਉਹਨਾਂ ਪੈ ਜਗੇ ਪੱਥਰ ਤਾਰੇ ਵੀ ਚਮਕਦੇ ਨੇ ਜੇ ਤਾਰੇ ਕਿੱਥੇ ਚਮਕੜਨ ਕਾਹਨ ਹੋਰ ਕਹਿਤੀ ਕਿੰਨੀ ਦਾ ਮਤਲਬ ਭੇਜਣਾ ਚਮਕਦਾ ਵੀ ਹੁੰਦਾ ਜਾਂ ਵੀ ਪੈਣਾ ਹੁੰਦਾ ਆਰਕ ਪੈਦੀਆ ਬਦਲ ਚਮਕ ਵੀ ਨਾ ਹੁੰਦੀ ਐ ਜਦ ਮਨ ਭਜਿਆ ਤਾਂ ਚਮਕ ਵੀ ਅੰਦਰੋਂ ਅੰਦਰੋਂ ਪੈਦਾ ਹੋਇਆ ਕੁਝ ਗਿਆਨ ਉਹ ਦੇਖਿਆ ਕੁਝ ਓਹੋ ਉਹ ਤਾਂ ਗੱਲੇ ਹੋਰ ਐ ਚਮਤਕਾਰ ਹੋਇਆ ਚਮਤਕਾਰ ਚਮਤਕਾਰ ਨਹੀਂ ਕੋਈ ਹੁੰਦਾ ਚਮਤਕਾਰ ਅੰਦਰ ਚਮਤਕਾਰ ਹੋਇਆ ਉਹ ਤਾਂ ਹੋਇਆ ਉੱਠਾ ਛੇਪੜ ਲਾਏ ਫੇਰ ਕੀ ਸੀ ਉਹ ਤਾਂ ਲਾ ਕੇ ਉੱਠਾ ਆਇਆ ਸਭ ਜਾਨ ਲਾ ਗਈ ਇਕਦਮ ਓਹੋ ਇਹ ਤਾਂ ਸਾਰਾ ਇਹ ਤਾਂ ਰਾਮ ਅਦਰੇ ਇਹ ਤਾਂ ਰਮਾਣਾ ਗੁਰਵਾਣੀਆਂ ਹੀ ਰਮਾਣ ਦੀ ਕਥਾ ਇਹ ਤਾਂ ਇਹੀ ਇਸ ਨੂੰ ਕਿਹਾ ਰਾਮ ਕਥਾ ਜੋ ਕੁਝ ਕੋਟਾਲੇ ਸਭ ਕੋ ਪਾਸ ਕਰਦੇ ਸਾਰੇ ਕਹਿੰਦੇ ਜਿੱਤੇ ਕੋਈ ਅਡਲ ਫਰਕ ਦੀ ਉੱਤੇ ਤਾਂ ਹੋਰ ਮੈਂ ਦਾ ਫਰਕ ਪਾਇਆ ਹੋਇਆ ਉਸਰ ਰਾਮ ਕਥਾ ਇਹੀ ਹਰ ਕੀ ਕਥਾ ਹਰਿਖਾਵਤਾਰ ਰਾਮ ਸਭ ਤੋਂ ਉੱਤਮ ਹਰ ਕੀ ਕਥਾ ਕਹਿੰਦਾ ਉਹ ਵੀ ਇਹੀ ਹੈ ਹਰ ਕਥਾ ਇਹ ਗੱਲਾਂ ਦੀ ਸਮਝਾਉਣ ਲੱਗੀ ਫਟਾਫਟ ਬਹੁਤ ਤੇਜ਼ੀ ਨਾਲ ਉਹ ਚਾਚਾ ਬਲਾਏ ਦਾ ਮਤਲਬ ਇਹ ਹੈ ਬਹੁਤ ਤੇਜ਼ੀ ਨਾਲ ਮਿਹਰੀ ਖਾਗੀ ਜਾਂਦੀ ਸਾਰੇ ਗੱਲ ਸਮਝ ਚੌਲ ਲੱਗ ਗਈ ਓਹੋ ਅਸੀਂ ਤਾਂ ਸਾਰੇ ਨਾਲ ਅਰਥ ਗਰੀ ਬੈਠੇ ਹਾਂ ਜੀ ਜਿੱਤ ਬੁੱਠ ਅੰਨ ਤੰਨ ਬਹੁਤ ਉਪਜੈ ਕਰੇ ਰਜਾਈ ਜਦ ਸਾਰੇ ਕਰਦਣਾ ਉਹਦੀ ਨਾਲ ਅੰਨ ਤੰਨ ਬਹੁਤ ਉਪਜਦਾ ਹੈ ਬੋਧ ਗਿਆਨ ਪੈਦਾ ਹੋ ਜਾਂਦਾ ਹੈ ਵਿਅਕਤ ਗਿਆਨ ਪੈਦਾ ਹੋ ਜਾਂਦਾ ਹੈ ਉਹਦੀ ਕਿਰਪਾ ਨਾਲ ਰਜ਼ਾ ਨਾਲ ਭਾਲੇ ਦੇ ਵਿਚਾਰਣ ਨਾਲ ਉਹ ਸਾਰੇ ਪੱਤੇ ਜਿਹੜੇ ਪੁੱਠੇ ਹੋ ਜਾਂਦੇ ਸੀ ਪੁੱਠੇ ਹੋਏ ਨੇ ਸਿੱਧੇ ਹੋ ਗਏ ਪਤਾ ਲੱਗ ਗਿਆ ਵੀ ਆਹ ਹੈ ਪੁੱਠੇ ਦਾ ਪਤਾ ਨਹੀਂ ਹੁੰਦਾ ਪੱਤੇ ਸਾਰੇ ਸਾਡੇ ਕੋਲ ਪੁੱਠੇ ਹੋਏ ਨੇ ਉਹ ਉਠਣ ਨਾਲ ਫਿਰ ਅੰਦਰ ਨਾਮ ਧੰਨ ਪੈਦਾ ਹੋਇਆ ਇਹੀ ਅੰਨ ਹੈ ਸਮਝੋ ਹੈ ਇਹੀ ਅਨ ਨਹੀਂ ਆਉਂਦਾ ਇਕ ਨਹੀਂ ਆਉਂਦਾ ਡੱਡਰ ਸਹਿਗਾ ਹੀ ਚੱਲਣਾ। ਇਹੀ ਅਨ ਭਗਤੀ ਹੈ ਹਾਂਜੀ। ਇਹਦੇ ਅਨ ਨੂੰ ਦਾ ਜਾਂਦਾ ਉੱਥੇ ਅਨ ਨੂੰ ਉਕੜ ਹੋਈ ਨਹੀਂ ਸਕਦਾ। ਅਨ ਨੂੰ ਵੀ ਉਕੜ। ਅਨ ਨੂੰ ਵੀ ਉਕੜ। ਉੱਥੇ ਤਾਂ ਵੀ ਕਈ ਪ੍ਰਕਾਰ ਦਾ ਸੰਸਾਰ 'ਚ ਹੱਦ ਠੀਕ ਹੈ ਜੀ। ਇਹ ਜਿਹੜਾ ਖਾਸ ਨਾਮ ਧੰਨ ਨਾਮ ਅਨ ਹੈ ਕਰੇ ਵਿਖੰਡ ਆਓ ਬਹੁਤ ਬਚਨੇ ਆਏਗਾ। ਹਾਂ जित खादे मन तृप्ति है जियां जुगत समाए ए तन करते का खेल है कदे आवे कदे जाई ए खादे ते मन तृप्तदा तांडी जो बुद्धि खुराक जो है आंत वर्दी जो है तन मन तृप्ति है, है। जियां जिया जुगत जिया जिया समाए ये ने जुगती आ जाती है सोण ने ਉਹ ਉੱਤੇ ਬਿੱਤੀ ਦੀ ਲੋੜ ਨਹੀਂ ਆਇਆ ਜੀ ਆ ਜੀ ਆਰਾ ਜੁਤੀ ਵੱੜ ਜਾਂਦੀ ਹੈ ਸਮਾ ਜਾਂਦਾ ਬਿੰਤੀ ਕੋਲ ਲਾ ਕੇ ਇਹਨਾਂ ਨੇ ਸਭ ਪੈਦਾ ਕਰਦੇ ਹਾਂ ਇਹ ਧਨ ਕਰਤੇ ਕਾ ਖੇਲ ਹੈ ਕਦੇ ਆਵੇ ਕਦੇ ਜਾਏ ਇਹ ਤਾਂ ਕਰਤੇ ਦਾ ਖੇਲ ਧਨ ਇਹ ਤਾਂ ਕਰਤੇ ਕਾ ਖੇਲ ਕਦੇ ਆਵਾ ਕਦੇ ਜਾਏ ਕਦੇ ਆਜਾਦਾ ਕਦੇ ਹੁਦਾਈ ਚਲਾ ਜਾਂਦਾ ਇਹ ਰਹਿੰਦਾ ਹੀ ਨਹੀਂ ਇੱਥੇ ਏਡਾ ਪ੍ਰਕਾਰ ਨਹੀਂ ਰਹਿੰਦਾ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਜਹਾ ਉਹਦਾ ਗਿਆਨ ਨਹੀਂ ਹੁੰਦਾ ਇਹ ਸਰਸਤੀ ਨਦੀ ਕਹਿੰਦਾ ਕਿ 12 ਕੋ ਚਲਦੀ ਹੈ ਗੁਪਤ 12 ਕੋ ਚਲਦੀ ਹੈ ਪਰਟਡ ਜੇ ਪਰਟਡ ਹੁੰਦੀ ਆ ਜਾਂਦਾ ਜੇ ਗੁਪਤ ਹੋ ਜਾਂਦਾ ਚਲਾ ਜਾਂਦਾ ਕਦੇ ਆਵਾ ਕਹੇ ਜਾਂ ਗਿਆਨੀਆ ਦਾ ਧਨ ਨਾਮ ਹੈ ਰਹੇ ਸਮਾਏ ਨਾਨਕ ਜਿੰਨ ਕੋ ਨਦਰ ਕਰੇ ਤਾਂ ਇਹ ਧਨ ਪੱਲੇ ਪਾਈ ਗਿਆਨੀਆਂ ਅਗਿਆਨੀਆਂ ਦਾ ਤਾਂ ਫਿਰ ਕੀ ਹੋਇਆ ਅਗਿਆਨੀਆਂ ਦਾ ਤੁਹਾਨੂੰ ਇੱਥੇ ਵੀ ਇੱਕ ਵਜਦੀ ਦੋ ਰੂਹੀ ਉਪਰੇ ਕਿਆਲੀਆਂ ਵਾਹੋ ਜਲੂਗੀ ਕਿਆਲੀਆਂ ਦਾ ਤਲਦ ਰੋਗ ਹੈ ਕਿਆਲੀਆਂ ਵਾਸਤੇ ਸੰਸਾਰ ਦੇ ਵਿੱਚ ਲੋਕ ਤਰ ਤੋਂ ਸਭਾ ਹੋਰ ਕੋਈ ਤਲਦ ਨਹੀਂ ਹੈ ਉਹ ਸਾਰੀ ਲੋਕਾਂ ਦਾ ਤਲਦ ਇਸ ਕਰਕੇ ਸਾਡੀ ਰਹੇ ਸਮਾਏ ਉਹ ਇਸ ਤਲਦ ਵਿੱਚ ਆਪਣੇ ਤਲਦ ਤੇ ਹਰੇਕੇ ਸੁਭਾ ਹੋ ਰਿਹਾ ਹੈ ਹਰੇਕੇ ਜੁੜਿਆ ਲੈ ਨਾ ਗਿੰਤੀ ਉਹਦੇ ਨਾਲ ਪਈ ਰਹਦੀ ਓਦੀ ਸਾਡੀ ਰਹੇ ਸਮਾਏ ਇਸ ਕਰਕੇ ਨਾਲ ਆਪਣਾ ਸਦੀ ਉਹਦੀ ਸੁਰਤੀ ਜੁੜੀ ਰਹੀ ਹੈ ਧਿਆਨ ਰੂਪ ਦਾ ਨਾਮ ਜਿਹੜਾ ਹੈ ਉਹਨਾਂ ਦਾ ਆਪਣੇ ਖਿਆਲ ਦੇ ਜੇ ਧਿਆਨ ਰੰਦਾ ਨਾਲਕ ਜਿੰਨ ਨਜ਼ਰ ਕਰੇ ਤਾਂ ਇਹਰ ਸਾਡ ਕੋਲ ਨੇ ਕੋਈ ਜਿਹਦੇ ਤੇ ਕਿਰਪਾ ਕਰਦੇ ਹੋ ਦੁਦਰ ਕਰਦਾ ਹੈ ਤਾਂ ਜਿਹਦੇ ਜਾਦੇ ਜਿਹਦੇ ਸੰਕੋਲ ਲੇ ਲੈਂਦੇ ਪਉਣਾ ਯਾਪ ਹੋ ਬੱਲੇ ਪਾਏ ਉਹ ਕਿਰਪਾ ਨਾਲ ਆਪੇ ਬੱਲੇ ਪਉਂਦਾ ਠੀਕ ਹੈ ਜੀ ਹੁਣ ਗਿਆਨੀਆਂ ਕਾ ਤੁਹਾਨੂੰ ਨਾਮ ਹੈ ਲਿਖ ਕੇ ਮੈਨ ਲੱਗਦਾ ਇਹ ਗੱਲ ਸਪਸ਼ਟ ਕਰਤੀ ਕਿ ਜੋ ਨਾਮ ਹੈ ਉਹ ਗਿਆਨ ਨਹੀਂ ਹੈ ਜੀ ਹਾਂ ਹਾਂ ਗਿਆਨ ਕਿੰਨੇ ਤਾਂ ਵਿਗਿਆਨੀਆਂ ਨੇ ਨਾ ਵਰਤਣਾ ਸੀ ਜਾਨੀਆਂ ਕੋਲ ਗਿਆਨ ਹੀ ਹੁੰਦਾ ਉਹੀ ਨਾਮ ਹੈ ਠੀਕ ਹੈ ਜੀ ਕੋੜੀ ਨਾਮ ਹੁੰਦਾ ਉਹੀ ਤਾਂ ਹੈ ਉਹਨਾਂ ਕੋਲ ਉਸੇ ਦਾ ਵਪਾਰ ਆਪ ਕਿਰਾਏ ਕਰੇ ਆਪ ਕਰੀ ਪੁਕਾਰ ਆਪੇ ਲੇਖਾ ਮੰਗਸੀ ਆਪ ਕਿਰਾਏਕਾਰ ਕਿਉਂਕਿ ਆਪ ਕਰੋ ਮੈਨੂੰ ਸਭ ਤੇ ਹੋ ਇਸ ਕਰਕੇ ਸਾਡੇ ਤੇ ਕੋਈ ਜ਼ੁਰਮ ਨਹੀਂ ਹੈ ਕਰਨ ਦਾ ਸਾਡੇ ਤੇ ਕੋਪਰ ਦਾ ਪਾਪ ਨਹੀਂ ਕਰੇ ਆਪ ਉਹ ਆਪ ਕਰਦਾ ਕਰਨਾ ਕਰਨਾ ਹੈ ਕਰਾਉਂਗਾ ਸਾਥੇ ਹੈ ਨਾ ਉਹ ਕਰਾ ਉਹਨਾਂ ਵਾਲੇ ਦੀ ਜ਼ੁਬੇਵਾਰੀ ਹੈ ਚਾਹੇ ਪੁੱਲ ਪਾਪੋ ਨੂੰ ਲੱਗੂ ਜਾਂ ਲੱਗੂ ਸਾਡੂਣੀ ਲੱਗੂ ਆਪ ਕਰਾਏ ਕਰੇ ਆਪ ਇਸ ਕਰਕੇ ਕਰਨ ਦੀ ਜ਼ੁਬੇਵਾਰੀ ਉਹਦੀ ਹੀ ਹੈ ਜਿਹੜਾ ਕਰਾਉਣ ਲਾਵੇ ਤਾਂ ਕੈਸਾ ਕਰੀ ਪੁਕਾਰ ਮੈਂ ਕਿਹਦੇ ਪੁਕਾਰ ਕਰਨ ਮੈਂ ਕੀਤਾ ਦੀ ਕੋਈ ਉਹ ਜਦ ਮੈਨੂੰ ਪੁੱਛੂ ਤਾਂ ਕੋਈ ਪਾਪ ਕੀਤਾ ਜਾਂਦੇ ਮੈਂ ਕਹੂੰਗਾ ਵੀ ਰੌਲਾ ਪੰਜਾਬ ਨੂੰ ਜਿਹਾ ਤੇ ਕਹੇ ਤੇ ਜਦ ਮੈਨੂੰ ਉਹ ਕਹੂਗਾ ਪਾਪ ਕੀਤਾ ਕੰਮ ਇਹ ਮੇਰੇ ਕੋ ਹੈਗਾ ਜਵਾਬ ਆਪ ਨੇ ਕਰਵਾਇਆ ਪਾਪ ਮੈਂ ਤਾਂ ਉਹ ਤੋਂ ਬੁੱਲੇਦਾ ਸਜ਼ਾ ਤੇ ਨਹੀਂ ਤੁਸੀਂ ਤੁਹਾਡੀ ਬਣਦੀ ਆਪੇ ਲੇਖਾ ਤੁਸੀਂ ਆਪ ਕਰਾਇਕਾਰ ਕੀ ਉਹ ਆਪੇ ਲੇਖਾ ਬੁਝਾ ਲਾਜੇ ਆਪ ਕਰਾਉਣਾ ਹੈ ਫਿਰ ਕੋਈ ਨਹੀਂ ਲਿਖ ਲੂਗਾ ਉਹ ਐ ਕਹੂਗੀ ਠੀਕ ਨਹੀਂ ਕੀਤਾ ਗਲਤ ਕੀਤਾ ਕੀ ਕਰਨ ਚਾਹੀਦਾ ਉਹ ਆਪੇ ਲੇਖਾ ਬੰਗਲੂ ਵੀ ਢਾਰਗਾ ਦੈ ਸਾਡੂ ਸਾਡੂ ਕੋਈ ਡਲਦੀ ਉਹ ਜੇ ਲੇਖਾ ਬੰਗਲੂ ਸਾਡੇ ਆਪੇ ਲੇਖਾ ਬੁਠੀ ਆਪੇ ਕਰਾਇਆ ਕੀ ਲੋੜ ਨਹੀਂ ਤਾਂ ਖਲਾਇਆ ਕੀ ਹੈ ਹੁਕਮ ਕਰੇਗਾ ਵਾਰ ਆਪ ਛਡਾਏ ਛੁੱਟੀਏ ਆਪੇ ਬਖਸ਼ਣ ਹਾਰ ਜੋਤਿਸ ਭਾਵਾਂ ਸੋਦੀਏ ਹੁਦਾ ਉਹ ਜੋ ਪਰਮੇਸ਼ਰ ਨੂੰ ਕੋਲ ਹੈ ਕੋਈ ਹੁੰਦਾ ਹੋਤੀਏ ਹੁਕਮ ਕਰੇਗਾ ਵਾਰ ਅਸੀਂ ਤਾਂ ਗਵਾਰਾਂ ਨੇ ਹੁਕਮ ਕਰਦੇ ਨਹੀਂ ਕਰਦਾਂ ਕਿ ਉਹ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਇਹ ਤਾਂ ਹੁਕਮ ਗਵਾਰਾਂ ਹੁਕਮ ਕਰਦਾ ਜਿਹੜਾ ਉਹ ਜਾਂਦੀ ਜੀ ਪੁਰਖ ਆਪ ਛਡਾਏ ਛੁੱਟੀਏ ਆਪੇ ਬਖਸ਼ਣ ਹਾਰ ਉਹ ਚਲਾਉਣਾ ਹੋਣੀ ਹੈ ਛੱਡਣਾ ਅਸੀਂ ਤਾਂ ਸਕਸ਼ਨ ਹਾਰਾ ਪਈਓ ਤੁਹਾਨੂੰ ਕੋ ਘਬਰਾਉਣ ਦੀ ਲੋੜ ਨਹੀਂ ਹੈ ਅਸੀਂ ਕੋਈ ਐਜੀ ਕੂਟ ਪਟੰਤ ਭਰਤੀ ਨਹੀਂ ਕੀਤੀ ਜੀ ਜੇ ਤੁਹਾਨੂੰ ਘਬਰਾਹਟ ਹੋਵੇ ਅਸੀਂ ਦੀ ਸਾਨੂੰ ਤਸੱਲੀ ਹੈ ਸਾਨੂੰ ਗਿਆਨ ਹੈ ਸਾਨੂੰ ਸਮਝ ਹੈ ਹੈ ਗਵਾਰ ਹੈ ਉਹ ਤਾਂ ਹੁਕਮ ਕਰਦਾ ਆਪੇ ਵੇਖੇ ਸੁਣੇ ਆਪ ਸਬ ਮੈਂ ਇੱਕ ਵਰਤਦਾ ਸਿਰਸਿਰ ਕਰੇ ਵਿਚਾਰ ਅੱਪੇ ਬੈ ਕੇ ਸੁਨੇ ਆਪ ਸਾਹਿਬ ਦੇਖਦਾ ਵੀ ਆ ਸਾਨੂੰ ਅਸੀਂ ਕੀ ਕਰਦੇ ਸਾਡੀ ਹਰ ਪ੍ਰਕਾਰ ਹਾਰੰਗਲ ਤੋਂ ਦੇਖਦਾ ਭੁੱਖੇ ਵੀ ਦੇਖਦਾ ਪਿਆਸੇ ਵੀ ਦੇਖਦਾ ਗਲਤ ਸੋਚ ਵੀ ਦੇਖਦਾ ਠੀਕ ਸੋਚ ਵੀ ਦੇਖਦਾ ਕਿਹੜਾ ਚੱਲਦੇ ਵੀ ਦੇਖਦਾ ਗੁੜੇ ਰਾ ਬਾੜੇ ਨਾਲ ਨੂੰ ਕੋੜ ਕੱਟਦੇ ਉਹ ਵੀ ਦੇਖਦਾ ਕਭ ਦੇ ਆਧਾਰ ਪਰ ਤਰੀਕੇ ਦਾ ਆਧਾਰ ਵੀ ਸਾਨੂੰ ਦਿੰਦਾ ਹਰ ਤਰੀਕੇ ਦਾ ਸਹਿਯਾਰ ਕਰਕੇ ਖਾਣਾ ਪੰਣਾ ਸਭ ਨੂੰ ਸਾਰਿਆਂ ਨੂੰ ਆਧਾਰ ਦੇ ਅੰਦਰ ਕੋਈ ਵਰਤਦਾ ਹਰਜੀ ਘਟ ਘਟ ਮੈਂ ਹਰਜੀ ਪਸੇ ਹਰ ਤਾਂ ਸਾਰਿਆਂ ਦੇ ਅੰਦਰ ਵਰਤਦਾ ਉਹਦਾ ਧਿਆਨ ਹਲਦਾ ਜੀਵ ਦੇ ਉੱਤੇ ਬੁੱਧੀ ਬੁੱਧੀ ਦੇ ਉੱਤੇ ਕਿਹ ਕੀ ਸੋਚਦਾ ਜੀ ਕੀ ਨਹੀਂ ਨਹੀਂ ਸੁਣਦਾ ਕੀ ਕੰਨਾ ਚਾਹੀਦਾ ਕੀ ਚੋਧੀ ਕਰਦੇ ਸਭ ਪਤਾ ਹੁੰਦਾ ਤਾਂ ਮੈਂ ਇੱਕ ਵਰਤਦਾ ਫਿਰ ਸਿਰ ਕਰੇ ਵਿਚਾਰ ਉਹ ਕੱਲੇ ਕੱਲੇ ਦੇ ਵਿਚਾਰ ਆਪਣੇ ਆਪਣੇ ਜਦੋਂ ਹੀ ਬੈਠਿਆ ਥੱਲੇ ਵਿਚਾਰ ਕਰਦਾ ਫਿਰ ਦੇ ਬੈਠਿਆ ਨਾਲੇ ਹੋ ਜਾਂਦੀ ਹੈ ਉਹ ਦੀ ਕਪੂੜੀ ਨਾਲੇ ਚੱਲੀ ਜਾਂਦਾ ਉਹ ਤੇ ਚਾਹ ਬੁੱਧੀ ਖਾਲੀ ਹੋ ਜਾਂਦੀ ਹੈ ਬੁੱਧੀ ਝਲਬੁਲ ਨਾਲੇ ਹਿਸਾਬ ਹੋ ਜਾਂਦਾ ਤੇ ਅਸੀਂ ਸੋਚਦੇ ਆਂ ਜਾਂ ਕਰਦੇ ਆ ਉਹਦੀ ਬੁੱਧੀ ਆ ਬਲੀ ਰੁੰਦੀ ਹੈ ਜਾਂ ਬੁੱਧੀ ਝਲਬੁਲ ਹੁੰਦੀ ਹੈ ਜਦ ਹਾਰ ਦੀ ਨਾਲੇ ਆਈ ਜਾਂਦਾ। ਕੋਈ ਲੇਖਾ ਨਹੀਂ ਕਰੇ। ਹਾਂਜੀ। ਗੁਰਮੁਖੀ ਆਪ ਵਿਚਾਰੀ ਐ। ਲੱਗੇ ਸੱਚ ਪਿਆਰ। ਨਾਨਕ ਕਿਸ ਗੁਰਮੁਖੀ ਆਪ ਵਿਚਾਰੀ ਐ। ਗੁਰਮੁਖ ਨੇ ਆਪਣਾ ਆਪਾ ਵਿਚਾਰਿਆ। ਕਿਸੇ ਨੂੰ ਨਹੀਂ ਵਿਚਾਰਿਆ। ਆਪਣਾ ਆਪਾ ਹੀ ਵਿਚਾਰਿਆ। ਆਪਣਾ ਮੋਲ ਵਿਚਾਰਿਆ ਉਹਨਾਂ ਨੇ ਵੀ ਇਹ ਕੀ ਕਰਦਾ। ਆਪਣਾ ਜਰਬਾਲ ਵਿੱਚ ਸਿੱਧੀ ਕਰਕੇ ਦੇਖਿਆ ਗੁਰਮੁਖ ਨੇ। ਲੱਗੇ ਸੱਚ ਪਿਆਰ ਤਾਂ ਕਿਤੇ ਦਾ ਸੱਚ ਨੂੰ ਪਿਆਰ ਲੱਗਦਾ ਉਹ ਸੱਚ ਆਪਣੇ ਦਿਲ ਦੇ ਉੱਤੇ ਧਿਆਨ ਰੱਖਦਾ ਇਹ ਕਿੰਦਰ ਨੂੰ ਚੱਲਦਾ ਕੀ ਕਰਦਾ ਕੀ ਨਹੀਂ ਕਰਦਾ ਕੀ ਕਰਨਾ ਚਾਹੀਦਾ ਕਿਉਂ ਨਹੀਂ ਕਰਦਾ ਆਪਣਾ ਵਿਚਾਰਦੇ ਮੇਰੇ 'ਚ ਕੀ ਔਗੜ ਮੇਰੇ ਕੋਲ ਲੋਕ ਬੜਿਆ ਮੇਰੇ 'ਚ ਆਪਣਾ ਵਿਚਾਰ ਆਪ ਵਿਚਾਰੀ ਹੈ ਤਾਂ ਜਦੇ ਚਾਹੇ ਸੱਚ ਨੂੰ ਪਿਆਰ ਲੱਗਦਾ ਹੈ ਕਿਸੇ ਨੂੰ ਵਾਕੀ ਆਪੇ ਦੇਵਨ ਹੋਰ ਨਾਨਕ ਦਾ ਕਹੀਏ ਕਿ ਦੇਵਨ ਆਸਾਂ ਉੱਤੇ ਬੈਠਾ ਉਹ ਅੰਦਲੇ ਦੇ ਥ्रू ਹੀ ਮਿਲਣਾ ਜੋ ਮਿਲਣਾ ਚਾਹੇ ਬਾਬੇ ਤੋਂ ਵੀ ਸਜਾ ਤੋਂ ਮਿਲੇ ਪਰ ਮਿਲਣਾ ਬਾਬੇ ਥਰੂ ਹੀ ਹੈ ਕਿ ਬਾਬੇ ਦੀ ਜਿਹੜਾ ਬਾਪ ਨੂੰ ਆਉਗੀ ਬਾਬੇ ਦੇ ਨਾਲ ਕੋਲੇ ਹੱਥੋਂ ਆਉਣਾ ਹੈ ਜੀ ਇੱਥੇ ਦਸਵੀਂ ਪੌੜੀ ਦੀ ਸਮਾਪਤੀ ਹੈ ਜੀ